ਹਾਂਜੀ ਪੱਬੇ ਅਖਰ ਤੋਂ ਵਿਦੇਸ਼ ਹੈ ਜੀ ਭਗਤ ਕਬੀਰ ਜੀ ਦਾ 32 ਪੌੜੀ ਚ ਵਿਦੇਸ਼ ਜੀ ਪੱਬਾ ਭੇਦ ਹੈ ਭੇਦ ਮਿਲਾਵਾ ਅਬ ਪਉ ਭਾਨ ਪਰੋਸੋ ਆਵਾ ਪੰਬਾ ਭੇਦ ਹੈ ਭੇਦ ਭੇਦ ਜਦੋਂ ਪਰਮਦੇ ਪਰਦੇ ਨੂੰ ਭੇਦ ਲਈਦਾ ਉਹਨੂੰ ਚਾਹ ਹੋ ਜਾਂਦੇ ਮਿਲਾਵਾ ਹੋ ਜਾਂਦਾ ਉਹ ਦੇ ਕੱਟ ਕਿੰਨਾਂ ਹੀ ਪੜਵਾ ਵਿਚਾਲੇ ਅਗੇ ਉਹ ਭੇਦ ਪਰਦਾ ਕਿਆ ਹੋ ਗਿਆ ਪਰਦਾ ਫਟ ਗਿਆ ਕਰਪਨਾਸ਼ ਹੋ ਗਿਆ ਉਹ ਦੋ ਇੱਕ ਹੋ ਜਾਂਦੇ ਨੇ ਹਾਂਜੀ ਪੱਬਾ ਭੇਦਾਂ ਭੇਦ ਮਿਲਾਵਾ ਅਬ ਪੌ ਭਾਨ ਪਰੋਸੋ ਆਵਾ ਆਪਣਾ ਮੂਲ ਹੈ ਜਿਹੜਾ ਉਹ ਭਾਨ ਰੋਜ਼ ਹੈ ਭਾਨ ਤੋਂ ਪੈਦਾ ਹੁੰਦੀ ਹੈ ਤੁਪ ਭਾਨ ਸੀ ਨਾ ਭਾਨ ਜੀ ਨੂੰ ਕਹਿੰਦੇ ਤੇ ਭਾਨ ਉਹਦੇ ਤੇ ਭਰੋਸਾ ਹੋ ਗਿਆ ਪਾਓ ਭਾਨ 'ਤੇ ਆਵਾ ਜੇ ਮੰਨ ਰੋਸ਼ਨੀ ਹੈ ਇਹ ਗੁਪਤੀ ਰੋਸ਼ਨੀ ਹੈ ਇਹਦਾ ਮੂਲ ਜਿਹੜਾ ਹੈਗਾ ਉਹ ਸੂਰਜ ਹੈ। ਟਰੋਸਾ ਹੋ ਗਿਆ ਵੀ ਇਹ ਤਾਂ ਮੇਰੀ ਉਪਤੀ ਹੈ। ਮੂਲ ਦਾ ਦਰਸ਼ਨ ਹੋ ਗਿਆ ਮੂਲ ਤੇ ਟਰੋਸਾ ਵੀ ਹੋ ਗਿਆ। ਹਾਂਜੀ। ਦਿਹਾਰੀ ਲੱਗੀ ਹੋਈ ਹੈ ਜੀ। ਅੱਬ ਪਉ ਭਾਨ ਪ੍ਰੋਸਵਾ ਹੁਣ ਭਾਨ ਦੇ ਜੋ ਸ਼ਕਤੀ ਬਾਹਰ થી ਹੈ ਮਨ ਕਰਤੀ ਹੈ ਮਨ ਸੀਓ ਅਸਲ ਕਿ ਉਹ ਜੋ ਬਾਹਰ ਤੋਂ ਭੀਤਰ ਜਾਂਦੇ ਆ ਜਿਵੇਂ ਮੈਗਨੇਟ ਦੇ ਵਿੱਚ ਇੱਕ ਸ਼ਕਤੀ ਹੁੰਦੀ ਹੈ ਸ਼ਕਤੀ ਹੈ ਲੋਹੇ ਨੂੰ ਖੇਦੀ ਮੈਗਨੇਟ ਦੀਦਾ ਅਸੂ ਹੈ ਉਹ ਮੈਗਨੇਟ ਦੀਦੀ ਗਿਆ ਉਹ ਮੈਗਨੇਟ ਮੈਗਨੇਟ ਦੀ ਸ਼ਕਰਾਵਾ ਤੇ ਹੈ ਹੈ ਜੋ ਕੁਛ ਹੈ ਇਹ ਮੈਗਨੇਟ ਦੀ ਸ਼ਕਤੀ ਮੈਗਨੇਟ ਦੋ ਦੀ ਹੁੰਦੀ ਪਰ ਉਹ ਸਾਬ ਹੋ ਗਿਆ ਵੀ ਜੈ ਮੈਨੇਮੈਂਟ ਕੋਈ ਉਤਪਤੀ ਹੈ ਸ਼ਕਤੀ ਦੀ ਜਿਹੜੀ ਖਿੱਚਦੀ ਹੈ ਲੋਹੇ ਨੂੰ ਜੋ ਬਾਹਰ ਤੋਂ ਪੀਤਰ ਜਾਂਦਾ ਪੀਤਰ ਬਾਹਰ ਇੱਕੋ ਹੀ ਹੈ ਅੰਦਰ ਬਾਹਰ ਇੱਕੋ ਜਾਨੂ ਇੱਕੋ ਸ੍ਰਿਸ਼ਟ ਸੁਭਾਈ ਕੇ ਉੱਤਰੇ ਦੋ ਰਿਆਣੇ ਚਿਰ ਨਾਲ ਦਾ ਅੱਧਾ ਦੇਖਿਆ ਨਹੀਂ ਉਹ ਵਿੱਚ ਉਹ ਕੁਝ ਹੋਰ ਲੱਗਦਾ ਜਾਂ ਦੇਖ ਲਿਆ ਫਿਰ ਇੱਕੋ ਹੀ ਭੇਦ ਭੂਪਤੀ ਉਹ ਪਤੀ ਪਹਿਚਾਨ ਲਿਆ ਜਿਹੜਾ ਜਿਹੜਾ ਮਾਲਕ ਸੀ ਹਿਰਦੇ ਦਾ ਸੁਧ ਦਾ ਮਾਲਕ ਸੀ ਉਹ ਪਹਿਚਾਨ ਲਿਆ ਤਾਂ ਪਰ ਕਾਇਕ ਸੁਣ ਗਈ ਬਾਸਾ ਛਾਣਾ ਪਰਦਾ ਬੁੱਧੀਦਾਰ ਭੀਤ ਕਰਾਰੀ ਉਹ ਮੇਰੀ ਭੀਤ ਕਰਾਰੀ ਜਿਹੜੀ ਸੀ ਉਹ ਹੋ ਗਈ ਟੁੱਟ ਗਈ ਉਹ ਭੇਡ ਦਿੱਤੀ ਉਹ ਦਿੱਤੀ ਦਿਵਾਰ ਢਹਿ ਗਈ ਉਹ ਮੇਰੀ ਉਹ ਪਤੀ ਉਮੀਦ ਸਾਹਿਬ ਦਾ ਜਿੰਨਾ ਉਪਦੇਸ਼ ਹੈ ਮਨ ਔਰ ਚਿੱਤ ਦੇ ਇੱਕ ਸਾਰੀ ਭਾਵਨਾ ਖਰੀਚ। ਦਾਰਦਾਂ ਦੇ ਖੋਲਦੇਗੇ। ਹੁਣ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈਗਾ ਜੀ ਫਲ ਪਾਵੈ ਗੁਰ ਪ੍ਰਸਾਦੀ ਜਿਹੜੇ ਲਬਜ਼ੇ ਦੇ ਖੋਜਦੇ ਨੇ ਜੋ ਖੋਜੇ ਸੋ ਪਾਵੈ। ਜੋ ਬ੍ਰਹਮਾਣ ਨੇ ਸੋ ਹੀ ਜੋ ਅੰਡੇ ਵਿੱਚ ਬ੍ਰਹਮ ਸੀ ਸਰੀਰ ਵਿੱਚ ਜੋ ਖੋਜੇ ਸੋ ਪਾਵੈ। ਜਿਹੜੇ ਖੋਜਦੇ ਨੇ ਰੱਬ ਲੰਦਰ ਤੋਂ ਪਰ ਪਾਵਲ ਹੋਈ ਗੁਰ ਪ੍ਰਸਾਦੀ ਜਿੰਨ ਕੋ ਭਾਉ ਪਿਆ ਆ ਗਿਆਨ ਦੀ ਕਿਰਪਾ ਨਾਲ ਜੇ ਨੇ ਗਿਆਨ ਹੋ ਜਾਂਦਾ ਹੈ ਨੂੰ ਭਾਉ ਪੈ ਜਾਂਦਾ ਕੋ ਲਵ ਲੰਦਰ ਮਨ ਮੁਖ ਨਾ ਚੇਤੇ ਮੂੜੇ ਲੱਖ 84 ਫੇਰ ਪਿਆ ਮਨ ਸੁਣ ਲੈਂਦੇ ਨੇ ਬੰਦੇ ਹੰਦੀ ਖੋਜਦੇ ਹੰਦੀ ਓ ਮੂਰਖ ਨੇ ਫਿਰ ਜਾਂਦੇ ਨੇ 184 ਦੇ ਘੇੜੇ ਚ ਘੁੱਭ ਜਾਂਦੇ ਨੇ 81 ਲੱਖ ਜੂਰ ਜਵਾਰ-ਵਾਰ ਆਈ ਜਾਂਦੇ ਨੇ ਪਰ ਉਹ ਸੁਣ ਕੇ ਵੀ ਨੇ ਜੰਮਣ ਨੇ ਇਹਦੇ ਦਾ ਜੰਮਣ ਮਨ ਕੱਟ ਨਹੀਂ ਹੁੰਦਾ ਹੋਜੀ ਠੀਕ ਹੈ ਜੀ ਗੁਰਮਤਾਸੀ ਵੱਲੋਂ ਪੱਟੀ ਮਹਲਾ ਤੀਜਾ ਚ 11ਵੀਂ ਪੌੜੀ ਦਾ ਉਪਦੇਸ਼ ਹੈ ਜੀ ਹਾਂ ਪਭੈ ਪਭ ਜਲ ਡੂਬੋ ਮੂੜੇ ਮਾਇਆ ਵਿੱਚ ਗੁਲਤਾਨ ਭਇਆ ਉਹ ਮੁਰਗਾ ਤਦ ਗੱਲ ਦੇ ਵਿੱਚ ਕਿਉਂ ਡੁੱਬਦਾ ਹੈ ਡੁੱਬਿਆ ਹੋਇਆ ਹੈ ਸਰੀਰ ਪਭ ਜਲ ਹੈ ਪਤਾ ਹੀ ਨਹੀਂ ਸਰੀਰ ਦਾ ਪਤਾ ਜੇ ਕੋਈ ਸਰੋਵਰ ਦੇ ਵਿੱਚ ਡੁੱਬ ਜਵੇ ਸਰੋਵਰ ਦੀਂਦਾ ਬੰਦਾ ਘੜਾ ਦੀਂਦਾ ਵਿੱਚ ਡੁੱਬਿਆ ਹੋਇਆ ਆਤਮਾ ਨਹੀਂ ਦੀਂਦੀ ਸਰੀਰ ਦੇ ਵਿੱਚ ਸਰੀਰ ਦੀਂਦਾ ਇਹ ਡੁੱਬਿਆ ਹੋਇਆ ਸਰੀਰ ਦੇ ਵਿੱਚ ਅੰਬਾ ਪਭ ਜਲ ਮਾਇਆ ਦੇ ਗੁਲਤਾਨ ਪਿਆ ਮਾਇਆ ਦੇ ਗੁਲਤਾਨ ਹੋਇਆ ਹੈ ਬਸ ਮਾਇਆ ਦੇ ਪਿੱਛੇ ਜੜਣੀਆਂ ਨੂੰ ਬੜਾ ਜੀ ਲੱਗਿਆ ਹੈ ਕਿ ਦਰਦਾਂ ਤੋਂ ਹੈ ਜੀ ਗੁਰਪ੍ਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰ ਪਿਆ ਵਾਸ ਗੁਰਪ੍ਰਸਾਦੀ ਜੇ ਗਿਆਨ ਤੇ ਕਿਰਪਾ ਨਾਲੇ ਤੂੰ ਜਾਣ ਲਵੇ ਆਪਣੇ ਆਪ ਨੂੰ ਜਾਣ ਲਵੇ ਬਸ ਇੱਕ ਘੜੀ ਪਾਰ ਹੋ ਜਾਂਦਾ ਮਾਇਆ ਤੋਂ ਅੱਡ ਹੋ ਜਾਂਦਾ ਮਾਇਆ ਤੋਂ ਵੱਖਰਾ ਹੋ ਜਾਂਦਾ ਇਕ ਹੋ ਕੇ ਰਹਿ ਜਾਂਦਾ ਆਪੇ ਇੱਕ ਬਣ ਜਾਂਦਾ ਹੋਜੀ ਠੀਕ ਹੈ ਜੀ ਹੁਣ ਉਪਦੇਸ਼ ਹੈਗਾ ਜੀ ਗੋੜੀ ਬਾਵਨਖਰੀ ਮਹੱਲਾ ਪੰਜਵਾਂ ਪੌੜੀ ਦਾ ਉਪਦੇਸ਼ ਜੀ ਪੌੜੀ ਭੱਵਾ ਪਰਮ ਮਿਟਾਵੋ ਆਪਣਾ ਕੀਆ ਸੰਸਾਰ ਸਗਲ ਹੈ ਸੁਪਨਾ ਪਰਮ ਮਟਾ ਲਓ ਜਿਹਨੇ ਕੀ ਪਰਮ ਕੀ ਆ ਸੰਸਾਰ ਸਗਲ ਹੈ ਸੁਪਨਾ ਇਹ ਜਿਹਨੂੰ ਸੱਚ ਕਰਕੇ ਬੰਦੀ ਬੈਠੇ ਸੰਸਾਰ ਨੂੰ ਇਹ ਸੁਪਨਾ ਇਹ ਸੁਪਨਾ ਹੈ ਸੁਣਿਆ ਬਹੁਤ ਹੈ ਤੁਸੀਂ ਘਰ ਬੁਲਿਆ ਦੀ ਜੇਕਰ ਮੰਨ ਲਿਆ ਪਰ ਬੜੀ ਜੂਗਾ ਜਿੰਨਾ ਚਿਰ ਸੁਣਦੇ ਇਉਂ ਪਰ ਬੜੀ ਬਿਜੂ ਉਹ ਸੱਚ ਕਰਕੇ ਜਾਣਿਆ ਹੈ ਸੁਪਨੇ ਦਾ ਘਾਟਾ ਵਾਦਾ ਘਾਟਾ ਵਾਦਾ ਦੇ ਰਹਿਦਾ ਜਾਂ ਜਾਗ ਰਹਿ ਸੁਰਨਰ ਦੇਵੀ ਦੇਵਾ ਪਰਮੇ ਸਿੱਧ ਸਾਧਕ ਬ੍ਰਹਮੇਵਾ ਇਸ ਭਰਮ ਦੇ ਵਿੱਚ ਸੁਰਨਾਰ ਦੇਵੀ ਦੇਵਾ ਵੀ ਭਰਮ ਹੋਏ ਨੇ ਉਹ ਵੀ ਸੱਚ ਬੰਦੇ ਨੇ ਔਰ ਜੀ ਧਰਤੀ ਆਕੀ ਸਾਰੇ ਬੈਠੇ ਨੇ ਸੁਰਨਾਰ ਦੇਵੀ ਦੇਵਾ ਪਰ ਮੈਂ ਸਿੱਧ ਸਾਧਕ ਬ੍ਰਹਮੇਵਾ ਇਹ ਬ੍ਰਾਹਮਣ ਪੰਡਤ ਇਹ ਸਿੱਧ ਕਰਨ ਵਾਲੇ ਜੋ ਰਸਤੇ ਕਿਨੇ ਕਿ ਸਿੱਧੀ ਪ੍ਰਾਪਤ ਕਰ ਲਈ ਇੱਕ ਸਿੱਧਰਿਆਂ ਕੇ ਚਲੇ ਆਉਂਦੇ ਕੀ ਬ੍ਰਾਹਮਣ ਨੇ வேதਾਂ ਦੇ ਜਾਣ ਪੜਨ ਸਾਰੇ ਹੀ ਸਤਿਮੰਦੀ ਨੇ ਪਾਰੇ ਹੀ ਪਰਿਚੇ। ਉਹ ਤਾਂ ਸੁਪਨਾ ਕਹੀ ਨੇ ਮੰਨਦੇ ਹੈ ਨਹੀਂ। ਬ੍ਰਾਹਮਣ ਨੂੰ ਹਾਂ ਜੀ ਬ੍ਰਹਮਣਾ ਨੂੰ ਕਿਹਾ ਜਿਹੜੇ ਵੇਦ ਪੜਨੇ ਵਾਲੇ ਨੇ ਵੇਦ ਪੜਾਉਣ ਵਾਲੇ ਨੇ। ਤਿੱਦ ਔਰ ਸਾਧਕ ਚ ਕੀ ਫਰਕ ਹੈ ਜੀ ਇੱਕੇ? ਸਾਧਕ ਜਿਹੜੇ ਸਾਧਨਾ ਕਰ ਰਹੇ ਹੈ ਅੱਛਾ ਜੀ ਹਰੀ ਪਰਮੇ ਪਰਮੇ ਮਾਨੁਖ ਡਹਕਾਏ ਦੁੱਤਰ ਮਹਾ ਵਿਖਮ ਇਹ ਮਾਇ ਪਰਮ ਪਰਮ ਵਿੱਚ ਸਾਰੇ ਮਨੋਖ ਡਹਕਾਏ ਜਿਵੇਂ ਡੋਲਦੇ ਨੇ ਕਿਸੇ ਦੇ ਅੰਦਰ ਵੀ ਟਿਕਾ ਨਹੀਂ ਜਿੱਤੇ ਪਰਮਾ ਦਾ ਟਿਕਾ ਹੁੰਦਾ ਹੀ ਨਹੀਂ ਦੁੱਤਰ ਮਹਾ ਵਿਖਮ ਇਹ ਮਾਇ ਇਹ ਜਿਹੜੀ ਮਹਾ ਵਿਖਮ ਮਾਇਆ ਕਹਿੰਦੇ ਨਹੀਂ ਤਰੀ ਜਾ ਸਕਦੀ ਇਹ ਲੋਕਾਂ ਨੂੰ ਵਿਸ਼ਵਾਸ ਹੈ ਇਹ ਪਰਮਾ ਇਹ ਤਰੀ ਜਾ ਸਕਦੀ ਤਰੀ ਕੀ ਜਾਨੀ ਉਦਾ ਝੂਠ ਨੂੰ ਸੱਚ ਬੁੱਧੀ ਬੈਠੇ ਹਾਂ ਜੀ ਗੁਰਮੁਖੀ ਭ੍ਰਮ ਪੈ ਮੋਹ ਮਿਟਾਇਆ ਨਾਨਕ ਤੇ ਪਰਮ ਸੁਖ ਪਾਇਆ ਕਿਸੇ ਗੁਰបង្ਕਣੇ ਮਿਲਦੇ ਨੇ ਪਰਮ ਅਤੇ ਉਹ ਜਿਹਨੇ ਵਡਾ ਲਿਆ ਪਰਮ ਸੁਖ ਦੀ ਪ੍ਰਾਪਤੀ ਹੋਈ ਹੈ ਨਾਨਕ ਤੇ ਪਰਮ ਸੁਖ ਪਾਇਆ ਉਹਨੂੰ ਪਰਮ ਸੁਖ ਦੀ ਪ੍ਰਾਪਤੀ ਹੋਈ ਹੈ ਜਿਹਨੇ ਆਪਣੇ ਅੰਦਰੋਂ ਪਰਮਾਤਮਾ ਵਰ ਬੋਹ ਦੋਏ ਮਿਟਾਉ ਦਸਤੇ ਜਿੱਦਾਂ ਜਿਹਨੋਂ ਬੋਹ ਹੈ ਗੁਰਨਾਥ ਜਰ ਪਰਮ ਰਹੂਗਾ ਠੀਕ ਹੈ ਜੀ ਇੱਥੇ 40ਵੀਂ ਪੌੜੀ ਦੇ ਉਪਦੇਸ਼ੀ ਸਮਾਪਤੀ ਹੈ ਜੀ ਹਾਂ ਜੀ ਇਹ ਭੱਬੇ ਦਾ ਭਗਤ ਕਬੀਰ ਜੀ ਤੋਂ ਸ਼ੁਰੂ ਹੋਈ ਸੀ ਗੱਲ ਜਿਨ੍ਹਾਂ ਨੇ ਇਹ ਭੇਦ ਨੂੰ ਜਾਣ ਲਿਆ ਉਹਨਾਂ ਦਾ ਮਨ ਅਰਚਿਤਿਕ ਹੋ ਗਿਆ ਜੀ ਜਿਨ੍ਹਾਂ ਨੇ ਮਨ ਨੂੰ ਭੇਦ ਲਿਆ ਹਾਂ ਜੀ ਹਾਂ ਤੇ ਗੁਰਨਾਥ ਸਾਹਿਬ ਕਹਿੰਦੇ ਆ ਕਿ ਜਦੋਂ ਤੱਕ ਤੁਸੀਂ ਭਾਲਦੇ ਨਹੀਂ ਆਪਣੇ ਮੂਲ ਨੂੰ ਜਦੋਂ ਤੱਕ ਦੁਬਾਰਾ 84 ਦਾ ਫੇਰ ਪਿਆ ਰਹੇਗਾ ਜੀ ਤੀਸਰੇ ਪਾਤਸ਼ਾਹ ਵੀ ਇਹੀ ਕਹਿੰਨੇ ਆ ਕਿ ਭੱਬੇ ਪਵਜਲ ਡੂਬੋ ਮੂੜੇ ਕਿ ਭੱਬ ਜਲ ਚ ਡੁੱਬਿਆ ਰਹੇਗਾ ਪਰ ਇੱਕ ਘੜੀ ਮੈਂ ਪਾਰ ਪਿਆ ਜੇ ਆਪਣੇ ਮੂਲ ਨੂੰ ਪਹਿਚਾਨ ਲਵੇ ਘੜੀ ਦੇ ਵਿੱਚੇ ਪਾਰ ਲੰਘ ਜਾਏਗਾ ਸਮਝਣ ਨੂੰ ਚੰ ਲੱਗਦਾ ਬੋਲੂ ਬਣਾਉਣ ਨੂੰ ਚੰ ਲੱਗਦਾ ਠੀਕ ਹੈ ਜੀ ਤੇ ਪੰਜਵੇਂ ਪਾਤਸ਼ਾਹ ਨੇ ਦੱਸਿਆ ਕਿ ਜਿੰਨੇ ਆਪਣੇ ਆਪ ਨੂੰ ਧਰਮਕ ਕਹੋਂਦੇ ਆ ਚਾਹੇ ਉਹ ਸਿੱਧ ਹੈ ਉਹ ਸਾਰੇ ਹੀ ਮਾਇਆ ਦੇ ਗ੍ਰਸੇ ਹੋਏ ਆ ਤੇ ਆਪਣਾ ਪਰ ਮਿਟਾ ਕੇ ਪਰਮ ਸੁਖ ਪਾਇਆ ਜਾ ਸਕਦਾ ਹੈ। ਪਾ ਠੀਕ ਹੈ ਜੀ ਇਹ ਪੱਬੇ ਅਖਰ ਦਾ ਉਪਦੇਸ਼ ਸੀਗਾ ਜੀ।